वंदा पड़े आखीए विद्या बिचरे सह सुभाई विद्या शोधे तत् लय राम नाम लिबलाईंदा पड़े आखीए पासे नु पड़े तांबे जाने चाहिए दिस विद्या बिचरे सह सुभाई दिस बिखरे सकरे नी बिचरे बेचारे ਹਾਂਜੀ ਵਿਚਰੇ ਸਹਿਜ ਸੁਭਾਈ ਪੰਦਾ ਪੜਿਆ ਆਖੀਏ ਵਿਦਿਆ ਵਿਚਰੇ ਸਹਿਜ ਸੁਭਾਈ ਅਬੇ ਧਿਆਨ ਵਿਚਾਰ ਕਰੇ ਵਿਚਾਰ ਕਰੇ ਸਹਿਜ ਵਿਵਸਥਾ ਜੋਕੇ ਤਕਾ ਜੋਕੇ ਕਾਲੇ ਜਨਨ ਕਰੇ ਮਨ ਬੱਧੀ ਜਾਂਦਾ ਪਤਾ ਇਹ ਇਹ ਤਾਂ ਬੁਝਾ ਰਹੇ ਸਹਿਜ ਵਿਵਸਥਾ ਜੋਕੇ ਇੱਕ ਹੋ ਕੇ ਵਿਚਾਰੇ ਮਿੱਠੀ ਅਰਥ ਮੰਨ ਲਈਦਾ ਅਰਥ ਹੋ ਜਾਣਗੇ ਕਹਾਂ ਪੜਿਆ ਪੱਤਾ ਇਹ ਸਾਰੇ ਪੱਤੇ ਨੂੰ ਪੜਦੇ ਵਿਦਿਆ ਸੁਮੂਰਗ ਬਣ ਕੇ ਬਿਦਿਆ ਸੱਤਲਾ ਹੈ ਹਾਂਜੀ ਇਹ ਬਿਦਿਆ ਸੈ ਸਵਾਏ ਵਿਚਾਰੂਗਾ ਬਿਦਿਆ ਸੋਦੀ ਜੂਗੀ ਬਿਦਿਆ ਦੇ ਅਰਥ ਬਦਲ ਜਾਣਗੇ ਠੀਕ ਹੈ ਜੀ ਇਹੀ ਤਾਰਸ ਬਦਲੇ ਨੇ ਹੋਰ ਕੀਤਾ ਜੀ ਆਪਾਂ ਨੇ ਇਹੀ ਤਾਂ ਗੁਰਬਾਨੀ ਨੇ ਅਸਤ ਬਦਲੇ ਸੀ ਜਿਹੜੇ ਫਿਰ ਗਨਲ ਚੌਧੇ ਕਰਤੀ ਐਸੇ ਵਾਇ ਆ ਗੱਲ ਛੱਡ ਕੇ ਬਤਿਆ ਦੇ ਚਾਕੇ ਟੀਕਾ ਆਪਣੇ ਵਾਲਾ ਥੋਪਤਾ ਲਾਈ ਸੀ ਇਹਦੀ ਅਣਦੇਖੀ ਕਰਤੀ ਠੀਕ ਸ਼ਰਤ ਹਾਂ ਇਹ ਕੇ ਅੰਦਰ ਰੋਗਾਂ ਕੀਤੀ ਵਿਦਿਆ ਸੋਧੇ ਤੱਤ ਲਹੇ ਜੇ ਵਿਦਿਆ ਸੋਧੀ ਜਾਊਗੀ ਤਾਂ ਇਹ ਜੋ ਤੱਤ ਮਿਲੂਗਾ ਵਿਦਿਆ ਸੋਧੀ ਹੋਈ ਨਹੀਂ ਮਾਇਆ ਵਾਸਤੇ ਵਿਦਿਆ ਸਾਡੀ ਲਿਖੀ ਹੋਈ ਅਸੀਂ ਦਿਰਾਕਾਰ ਵਾਸਤੇ ਨਵਦ ਕਟੇ ਅਲੱਗ ਹਮ ਅਰਤਕਾਲ ਨੇ ਵਿਦਿਆ ਹੈ ਜੀ ਸਾਕਾਰੀ ਸਾਕਾਰੀ ਅਰਥੂ ਦੇ ਨਾਕਾਰੀ ਦੁਨੀਆ ਦੇ ਅਰਥ ਕਰਦੇ ਠੀਕ ਹੈ ਪਰ ਸ਼ੰਤਾਲਨਾ ਦਾ ਪਾਰ ਦਾ ਗੱਲ ਹੈ ਜੀ ਭਾਸ਼ਾ ਹੈ ਜੀ ਸਾਕਾਰੀ ਮੁਦਰਾ ਵੀ ਕਰਕੇ ਦਿੱਤਾ ਸੋਧਲੀ ਤੂੰ ਐਜੀ ਬਿੱਦੇ ਸ੍ਰਾਪਤ ਰਾਮ ਨਾਮ ਲੈ ਹਾਂਜੀ ਵਾਦਾ ਦਾ ਗੁਰਮੁਖ ਹੈ। ਅਲਮੁਗੁਬੇ ਤੇ ਆ ਕੇ ਕਰਦਾ ਦੇ ਖੱਟੇ पे ਖਾਏ। ਇਹਨੂੰ ਮੁਖ ਹੈ ਤਾਂ ਕੜਵੇ ਦੇ ਖਾਦਾ। ਇਹ ਤਾਂ ਵੇਜਦਾ ਹਾਂਜੀ। ਬਿਕਾਰ ਖੱਡਦਾ ਜਾਂ ਮੋ ਖੈਰ ਖੱਟਣ ਜ਼ਹਿਰ ਵਾਲਾ ਉੱਬਰ ਦੂਦੂ ਕਬੇ ਦੇ ਦਸੜਕੇ ਹੂੰ ਤੁੰ ਨੂੰ ਅਬਰ ਜਿਹੜਾ ਸੀ ਅਸਮੋ ਜੋ ਅਬਰ ਦਾ ਜ਼ਹਿਰ ਖਾਣ ਵਾਲਾ ਜ਼ਹਿਰ ਖੱਟਣ ਵਾਲਾ ਵਿੱਡਿਆ ਵੇਚ ਕੇ ਹੂੰ ਮਿਤਵਾ ਇਹ ਦਾ ਨਾਮ ਉਬਰ ਕੇ ਦੇ ਦੇ ਵਿਦਵਾਨ ਜਦ ਤੱਕ ਆਉਦੇ ਭਗਵਾਨ ਕਾ ਵੀ ਰਸਤਿਆਂ ਬਕਾਉ ਹੈ। ਹਮਮ। ਸਭ ਲਾੜਾਂ ਚੜਦੇ ਵੀ ਇੱਕ ਦੂਏ ਦੀ। ਅਬ ਆ ਸਭੀ ਦੇ ਦੇ ਬਦੂ ਹੋਈ ਸਕੇ ਦੇ ਦੇ। ਇਹ ਲੋਕ ਥੱਕ ਜਾਂਦੇ ਤੰਦੇ ਤੁਨ ਕਿਵੇਂ ਆਸ ਕੀਤੀ ਜਾ ਸਕਦੀ ਦੀ ਇਹਨਾਂ ਲੋਕਾਂ ਨੂੰ। ਠੀਕ ਹੈ ਜੀ। ਹਾਂਜੀ ਮਨਮੁਖ ਵਿਦਿਆ ਬਿਖਰਦਾ ਵਿਖਖਟੇ ਵਿਖਾਏ ਮੂਰਖ ਸ਼ਬਦ ਨਾ ਚੀਨੈ ਸੂਝ ਬੂਝ ਨਹਿ ਚੀਨੀ ਮੂਰਖ ਜਿਹੜਾ ਉਹ ਸ਼ਬਦ ਖੋਜ ਕਰਦਾ ਕਰੀ ਜੁਦਾ। ਔਰ ਸ਼ਬਦ ਗੁਰਬਾਣੀ ਦੀ ਖੋਜ ਕਰਦੀ ਸੀ। ਹਾਂ। ਰਾਹੇ ਜਾਂਦਾ ਵੈਰੂ ਵੈਰੂ ਆਪੇ ਛੁੱਟ ਜਾਂਦਾ ਤੁਹਾਡਾ। ਗੁਰੂ ਦੇ ਜਾਦਰ ਨਾਲ ਕੀ ਵੀ ਉਹ ਬਾਹਲਾ ਆਪੇ ਛੁੱਟ ਜਾਂਦੀ ਸਮਾਧੀ ਆਪੇ ਛੁੱਟ ਜਾਂਦੀ ਜੇ ਗੁਰਮਾਣੀ ਨੂੰ ਵਿਚਾਰ ਦੇ ਉਹ ਤਾਂ ਵੀ tailed ਜਿਹੜਾ ਕਿਹਾ ਸੀ ਬੋਲ ਕੋ ਉਹ ਇਹ ਜਿਹੜਾ ਸ਼ਬਦ ਦਾ ਸੂਝ-ਬੂਝ ਨਾ ਘਾਏ ਉਹਨੂੰ ਕੁਝ ਵੀ ਸੂਝ-ਬੂਝ ਨਹੀਂ ਹੈ ਗੁਰੂ ਖਾ ਬਿਲਕੁਲੇ ਸਾਰੇ ਮੂਰਖ ਸੁਤ ਬਣਲੇ ਹੋਏ ਨੇ ਸਾਰੇ ਮੂਰਖ ਪ੍ਰਚਾਰਕ ਬਣਲੇ ਹੋਏ ਨੇ ਸਾਰੇ ਮੂਰਖ ਅੱਗੇ ਆਏ ਹੋਏ ਨੇ ਮੂਰਖਾਂ ਮੇ ਅਸੇ ਤਾਤਰੂ ਐਡੀ ਸੂਖਸ਼ਮ ਚੀਜ਼ ਮੂਰਖਾ ਜਾਣਦੇ ਨਹੀਂ ਉੱਚਾ ਉੱਪਰ ਧਾਈ ਦੀ ਉਠਿਆ ਦੌ ਸਾਰੇ ਜੋ